ਕਿਉਂ ਕਰ ਵਾਧਾ ਸਰਪ ਨਹੀਂ ਖਾਦਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤਤ ਵਿਚਾਰਾ ਸੋ ਗੁਰੂ ਹਮਾਰਾ ਫਿਰ ਸਵਾਲ ਕਰਦੇ ਗੱਲ ਕੋਈ ਇਹ ਸਵਾਲ ਦਾ ਜਵਾਬ ਦੇ ਦਿੱਤਾ ਸਵਾਲ ਹੋਈ ਹੈ ਦੂਏ ਤਰੀਕੇ ਨਾਲ ਕਰਦਾ ਕਹਿੰਦੇ ਇੱਕ ਹੋਰ ਗੱਲ ਕਹਿੰਦਾ ਸੀ ਸੁਣੀ ਹੈ ਬਈ ਜੀ ਬੰਨਿਆ ਹੈ ਫਜਾਇ ਜੰਦਾ ਯਾਰ ਤੇ ਪਰ ਸਰਪੜੀ ਦਾ ਖਾਦਾ ਹੋਇਆ ਹੈ ਕਿੰਘਿਆ ਹੈ ਕਿਵੇਂ ਹੋ ਗਿਆ ਕਾਰ ਖਾਦਾ ਕਿਵੇਂ ਖਾਦਾ ਕਿਉਂ ਖਾਦਾ ਕਿਉਂ ਕਰ ਵਾਦਾ ਇਹ ਜੀਮ ਕਿਉਂ ਹੋ ਗਿਆ ਮਾਇਆ ਵੱਜ ਗਿਆ ਬਾਯਾ ਦੇ ਬਰਨ ਕਿਉਂ ਪੈ ਗਿਆ ਕਿ ਬਿਮਾਰੀ ਹੋਈ ਸੀ ਸ਼ੁਰੂ ਜ ਪਹਿਲੀ ਪਹਿਲਾ ਸਭ ਤੋਂ ਉੱਚੀ ਬਿਮਾਰੀ ਰੂਪ ਚਲੀ ਵੱਡੇ ਆ ਕਿਉਂ ਆ ਕਿ ਕਾਰਨ ਸੀ ਸਰਪਣੀ ਖਾਤਾ ਆ ਸਰਪਣੀ ਮਾਇਆ ਅਗਰਬ ਦੇ ਵਿੱਚ ਕਿਵੇਂ ਸਰਪਤਨ ਜੇ ਤੱਕ ਮਾਇਆ ਦੇ ਵਿੱਚ ਸੜਿਆ ਆਇਆ ਹੈ ਸਰਪਣੀ ਦਾ ਖਾਤਾ ਹੋਇਆ ਇਹ ਵਿਚੇ ਰਹਿੰਦੇ ਨੇ ਇਹਦੇ ਪੇਟ ਜੇ ਮਾਇਆ ਦੇ ਬਾਹਰ ਕੱਢੀ ਜਾਂਦਾ ਪਰ ਕਿੱਥੇ ਜਾਣਾ ਜਿੱਥੇ ਤੱਕ ਮਾਇਆ ਦੇ ਅੰਦਰ ਹੈ ਮਾਇਆ ਕੀ ਹੈ ਮਾਇਆ ਕੁਝ ਨਹੀਂ ਮਾਇਆ ਪਰ ਹੈ ਇਸੇ ਕਰਕੇ ਰੰਗ ਨਾ ਹੋਵੇ ਦਾੰਤ ਵੀ ਮਾਇਆ ਪਛਾਈ ਜੀ ਤੂੰ ਇਹਦਾ ਬਾਹੜ ਹੈ ਜਾਗ ਤੂੰ ਇਹ ਵੀ ਬਾਹੜ ਵੀ ਹੈ ਤੂੰ ਤੂੰ ਇਹਦਾ ਤਾਂ ਹੁੰਦਾ ਹੈ ਪਰਮਤਿ ਘਰਿਆ ਹੋਇਆ ਹੈ ਤੂੰ ਜਿਖ ਰਿਹਾ ਹੈ ਚਾਰੇ ਪਾਸੇ ਤੂੰ ਜਿੱਦ ਤੱਕ ਥੋੜੀ ਜਿਹਾ ਜੋਤ ਰਾਂਜੀ ਆਈ ਦੇ ਨੰਡੇ ਨੰਡੇ ਆਪ ਨੂੰ ਤੇ ਜਿਹੜੀ ਆਪਣੀ ਜੋਤ ਹੈ ਉਹਨੇ ਕਿੱਥੋਂ ਜੋਤ ਰਾਂਦੀ ਕਿਉਂ ਕਰ ਸਰਪਣੀ ਖਾਦਾ ਕਿਉਂ ਕਰ ਘੋਇਆ ਕਿਉਂ ਕਰ ਲਾਦਾ ਚਾਰ ਸਵਾਲ ਹੋ ਗਏ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਵਿਚਾਰੇ ਤੋਂ ਗੁਰੂ ਹੋਣਾ ਕਿਉਂ ਕਰ ਨਿਰਮਲ ਨਿਰਮਲ ਕਦੇ ਹੋਵੇ ਤਾਂ ਬਰ ਕਿ ਨਿਰਮਲ ਹੋ ਜਾਂਦੂ ਚੀਜ਼ ਪਈ ਦਿੱਤੀ ਹੈ ਦੂਰ ਤੱਕ ਜੇ ਉਹ ਬਦਲਾ ਕਰਦੀ ਕੋਈ ਨਹੀਂ ਦੀ ਤੂੰ ਗੱਦੜਾ ਕੀਤਾ ਹੈ ਗਿਆਨ ਦਾ ਹਨੇਰਾ ਅਰਦਾ ਗੱਦੜਾ ਜੇ ਇਹਦੇ ਸਾਡੇ ਗੱਦੜਾ ਰੋ ਤਰ ਤੰਦੇ ਰਹਾ ਜੇ ਅੰਦਰ ਟਿਕਿਆ ਹੋਇਆ ਸੱਚ ਰੋਸ਼ਨੀ ਕਿਉਂਕਿ ਨਿਰਮਲ ਚੋਂ ਕਰ ਹਨੇਰਾ ਜੇ ਨਿਰਮਲ ਹੋ ਜਾ ਬੋਲੂ ਜੇ ਭਰਮ ਦਾ ਪਰਦਾ ਪੈ ਜਾਏ ਅੱਖ ਚ ਪੂਰਾ ਨਹੀਂ ਰਹੋ ਜਾਂਦਾ ਜੇ ਬੁੱਧੀ ਚ ਦੁਰਵਤ ਭਰਮ ਪੈਦਾ ਕਰਦੀ ਹੈ ਦੁਰਵਤ ਭਰਮ ਪੈਦਾ ਹੁੰਦਾ ਬੁੱਧਿ ਚ ਤੇ ਗੁਰਬਾਤ ਰੋਝਾਲਾ ਪਰ ਹੁੰਦਾ ਸਾਡ ਦੇ ਇਹ ਤਤ ਵਿਚਾਰ ਗੁਰੂ ਹਮਾਰਾ ਕਹਿੰਦੇ ਜਿਹੜਾ ਇਹ ਤਤ ਵਿਚਾਰ ਦਵੇ ਉਹਨੂੰ ਗੁਰੂ ਬੋਲਦੇ ਉਹ ਸਿਰੇ ਦੀ ਗੱਲ ਹੈ ਬੜਾ ਜਵਾਬ ਸਿਰੇ ਦਾ ਆਹ ਉਹ ਨਾ ਬਹੁਤ ਸਾਰੇ ਦੇ ਸਵਾਲ ਨੇ ਆਹ ਸਵਾਲ ਛੇ ਦਾ ਸੀ ਫਿਰ ਅੱਜ ਲੈਣਾ ਸਵਾਲ ਕਰਦੇ ਅਸੀਂ ਕੱਲ੍ਹ ਹੈ ਜਵਾਬ ਤਾਂ ਦੇ ਦਿੱਤੇ ਜਿਹੜਾ ਇਹ ਸਵਾਲ ਦਾ ਜਵਾਬ ਦੇਵੇ ਚਲੋ ਅਸੀਂ ਮੰਨ ਲਿਏ ਉਹਨੂੰ ਜੋਗੀ ਕਹਿੰਦੇ ਇਹ ਤਤ ਵਿਚਾਰ ਹੈ ਇਹ ਕੋਈ ਨੂੰ ਜੋਗੀ ਬਿਲਕੁਲ ਨਹੀਂ ਜੋਗੀ ਤਤ ਨੂੰ ਸਮਝਦੇ ਨੇ ਖੜਦੇ ਨੇ ਜਾਣਦੇ ਨੇ ਸਿਕਰ ਨੂੰ ਤਸਵਾਰੇ ਕੋਈ ਪਤਾ ਨਹੀਂ ਉਹ ਵਿਵਸੀ ਵਾਲਾ ਤਸਵਾਰੇ ਕੋਈ ਪਤਾ ਨਹੀਂ ਟੀਕਾ ਕਰਿਆ ਉਹਨਾਂ ਤਸਵਾਰੇ ਕੋਈ ਪਤਾ ਨਹੀਂ ਤਸਤ ਵਿਚਾਰ ਕਹੇ ਜਦ ਸੱਚਾ ਤਸਤ ਵਿਚਾਰ ਕਹੀਏ ਸੱਚ aeration ਦੀ ਗਈ ਹੋਈ ਹੈ ਕਹਾਰਾ ਜਦ ਸੱਚਾ ਜਦ ਉਹ ਬਰੇ ਸੋ ਅਸੀਂ ਕੀ ਪੜਦੇ ਆ ਉਹ ਕਹਾਣੀਏ ਸ਼ਰੀਰਾਂ ਦੀਏ ਜਿਹੜੇ ਜੱਗਲ ਸੀ ਹੋਰ ਬਣ ਗਏ ਤਕਾਚੋ ਤਕਾਚਾ ਇਦਾਂ ਬੜ ਗਿਆ ਕੱਚੋ ਕੱਚਾ ਦਾ ਸਾਰਾ ਜਨਮ ਮਰੇ ਸਰੀਰ ਜਗਿਆ ਸੀ ਮਰ ਗਿਆ ਇਹਦੇ ਬਾਰੇ ਜੋ ਕੋਈ ਜਾਣ बारे ਸਭ ਕੱਚੀ ਗੱਲ ਆਤਮਾ ਬਾਰੇ ਜਾਣਣਾ ਸੀ ਸਰੀਰ ਬਾਰੇ ਜਾਣ ਪਾਉ। ਉਹ ਸਰੀਰ ਦਾ ਤੇ ਸਾਰਾ ਕੱਚਾ ਹੈ ਕਾਚੀ ਗਾਗੜ ਸਰ ਪਰ ਫੁੱਟਾ ਸੱਤੇ ਫੁੱਟੀ ਕਰਨ ਕੀ ਵਿਚਾਰੇ ਬੁਟੀ ਹੋ ਰਹੀਓ ਬੁਟੀ ਕਿੱਥੋਂ ਲਿਆਉਣ